ਗੁਰ ਕਾ ਸ਼ਬਦ ਅਰਾਧੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਗੁਰ ਸ਼ਬਦ ਅਰਾਧੀ ਹੈ ਗੁਰ ਉਪਦੇਸ਼ ਹੈ ਜਿਹੜਾ ਗੁਰ ਕਾ ਉਪਦੇਸ਼ ਹੈ ਗੁਰਬਾਣੀ ਅਨੁਸਾਰ ਜੋ ਇਹਨੇ ਦੱਸਿਆ ਅਰਾਧਨਾ ਉਹ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ ਅਰਾਧਲਾ ਗਾਦੀ ਕਰਦੀ ਏ ਅਰਾਧਲਾ ਅਰਾਧਨ ਦੀ ਕਹ ਹਰਾ ਨਾਮ ਅਰਾਧਨ ਨਾਮ ਦੀ ਅਰਾਧਨ ਕਰਦੀ ਏ ਜੇ ਨਾਮ ਮੰਗਣਾ ਗਈਦਾ ਨਾਨਕ ਰੰਗ ਬਹਾਰਾ ਨਾਨਕ ਕਹਦਾ ਰੰਗ ਨਾਮ ਦਾ ਇਹੀ ਤਾਂ ਬਾਰਾ ਇਹ ਰਾਗ ਰਹਿਤ ਕਰ ਦਿੰਦਾ ਨਾਮ ਦਾ ਰੰਗ ਇਹ ਜਿਹੜਾ ਦੁਨੀਆਂ ਦੀਆਂ ਪਿੱਛਾਵਾਂ ਮੁਕਤ ਕਰ ਦੇਣਾ ਦੁਨੀਆਂ ਦੀ ਭੁੱਖ ਜਿਹੜੀ ਬਾਹਾਂ ਦੀ ਭੁੱਖ ਲੇਗਾ ਨਹੀਂ ਤੇ ਜਣਾ ਭੁੱਖ ਉੱਤਰ ਜਾਣੀ ਹੀ ਤਾਂ ਬਹਿਰਾ ਹੈ ਹੋਰ ਕੀ ਹੈ ਬਹਿਰਾ ਸਾਧ ਦਾ ਰੰਗ ਤੇ ਜਣਾ ਭੁੱਖ ਉਤਾਰਦਾ ਹੈ ਜੀਤੇ ਪੰਜ ਬਹਿਰਾਈਆਂ ਸਫਲ ਮਾਰੂ ਇਹ ਰਾਗ ਜਿਨ੍ਹਾਂ ਨੇ ਪੰਜ ਜਿੱਤ ਲੈ ਇਹ ਮਾਰੂ ਰਾਗ ਪਰ ਜੇ ਮਾਰ ਲੈ ਇਹ ਮਾਰੂ ਰਾਗ ਸਫਲ ਹੈ ਜਿਹੜਾ ਉਹ ਦੂਆ ਮਾਰੂ ਰਾਗ ਸਫਲ ਨਹੀਂ ਹੈ ਉਹ ਨਕਲੀ ਮਾਰੂ ਰਾਗ ਹੈ ਇਹ ਬਹਿਰੀ ਨਹੀਂ ਜਿੱਤ ਸਕਦਾ ਮਾਰੂ ਦਾ ਉਹ ਆਇਆ ਗਿਆ ਬੈਰੀ ਜੱਤਲ ਵਿੱਚ ਇੱਥੇ ਬੈਰੀ ਕੋਈ ਨਹੀਂ ਨਾ ਜੱਤਲ ਦੀ ਗੱਲ ਆ ਮਾਰੂ ਰਾਗ ਦਾ ਉਹ ਮਾਰੂ ਰਾਗ ਸਫਲ ਹੈ ਰਾਗੀ ਹੈ ਗੁਰਬਾਣੀ ਰਾਗ ਹੈ ਰਾਗਾ ਬੈਰਾਗਿਆ ਕਾਦਾ ਨਾਮ ਤੇ ਨਾਮ ਦੀ ਇੱਛਾ ਹੈ ਨਾਮ ਦੀ ਭੁੱਖ ਹੈ ਤੇ ਮਾਇਆ ਦੀ ਭੁੱਖ ਛੱਡਣੂ ਕੇ ਮਾਇਆ ਦੀ ਭੁੱਖ ਛੱਡਣੀ ਬੈਰਾਗ ਹੈ ਨਾਮ ਦੀ ਭੁੱਖ ਜਗਾਉਣੀ ਰਾਗ ਹੈ ਗੁਰਬਾਣੀ ਰਾਗ ਹੈ ਨਾਮ ਦੀ ਭੁੱਖ ਜਗਾ ਰਹੀ ਹੈ ਇਹ ਸਬਦਾਲਾ ਜੱਜ ਗੁਰਬਾਣੀ ਚ ਉਹਦੀ ਡੈਫੀਨੇਸ਼ਨ ਦਿੱਤੀ ਨਾ ਸਾਡੀ ਗੁਰਬਾਣੀ ਮਾਰੂ ਰਾਗ ਹੀ ਹੈ ਅੱਛਾ ਜੀ ਉਹਨੂੰ ਸੁਣਾ ਕਰਕੇ ਮਾਰੂ ਰਾਗ ਹੈ ਇਹ ਘੋੜਾ ਕਰਕੇ ਮਾਰੂ ਰਹਾ ਹੈ ਇਹ ਪੈਰਾਂਿਆਂ ਜੱਤਣ ਕਰਕੇ ਇਹ ਘੋੜ ਕਰਕੇ ਕੱਲਦਾ ਔਥੇ ਛੁਰ ਕਰਕੇ ਮਾਰੂ ਰਹਾ ਇੱਥੇ ਤੀਸਰੇ ਸ਼ਲੋਕ ਦੀ ਸਮਾਪਤੀ ਹੈ